पन्ना नंबर 343 45 घट अवघट डूंगरणा एक निर्गुण बैल हमार रमइये सूं एक बेनती मेरी पूंजी राख मुरार आ जेड़ा रा है ना रास्ता ए काटा बकाटा ऊंचा नी मा पतरा रास्ता नी है जिमे काठी चढ़ी दा ਸਾੜੀ ਰਸਤਾ ਹੁੰਦਾ ਕਦੇ ਉੱਚਾ ਆ ਗਿਆ ਕਦੇ ਨੀਵਾ ਆ ਗਿਆ ਉਹਨੂੰ ਖਾਬ ਘਟ ਕਹਿੰਦੇ ਨੇ ਕਦੇ ਹਿਰਦੇ ਚੱਲ ਜਾਂਦਾ ਕਦੇ ਮਾਇਆ ਚ ਆ ਜਾਂਦਾ ਡੁੱਗਰ ਘਣਾ ਇਹ ਤਾਂ ਜਦ ਡੂੰਘਾ ਗਹਿਰਾਈ ਵੀ ਹੈ ਨਰਕ ਨੂੰ ਵੀ ਜਾ ਸਕਦਾ ਨਰਕਾਂ ਦੀਆਂ ਜੁਨੀਆਂ ਥੱਲੇ ਹੀ ਨੇ ਸਭ ਖਾਈ ਜਿਹਦੇ ਪਿਆ ਤਾਂ ਨਰਕ ਚਲਾ ਜਾਊਗਾ ਨੀਮਤੋਂ ਚਲਾ ਜਾਊਗਾ ਡੁੰਗਰ ਖਣਾ ਇੱਕ ਨਿਰਗੁਣ ਬੈਲ ਹੁਆ ਜਿਹੜਾ ਬੈਲ ਹੈ ਉਹ ਗਾ ਨਿਰਗੁਣ ਮੰਨ ਜਿਹੜਾ ਨਿਰਗੁਣ ਕੋਈ ਗੁਣ ਕੋਈ ਨਹੀਂ ਆ ਤੇ ਰਸਤਾ ਉੱਚਾ ਨਹੀਂ ਮੈਂ ਉਹ ਇਸ ਰਸਤੇ ਦਾ ਚੱਲਿਆ ਹੋਇਆ ਨਹੀਂ ਇਸ ਰਸਤੇ ਦਾ ਵਾਕਫ ਨਹੀਂ ਹੈ ਪਹਾੜਾਂ ਦੇ ਬੋਦਲਾਂ ਦੇ ਉੱਤੇ ਅੱਗੇ ਹੁੰਦੇ ਸੀ ਲੱਦ ਕੇ ਸਮਾਨ ਵਪਾਰੀ ਬੋਦਲਾਂ ਤੇ ਵਪਾਰ ਕਰਦੇ ਸੀ ਬੋਦਲਾਂ ਤੇ ਲੱਦ ਕੇ ਉਹ ਗੱਲ ਕਰ ਰਹੇ ਹੈ ਇਹ ਪਹਾੜੀ ਰਸਤੇ ਦਾ ਬਗਬ ਕੋਈ ਨਹੀਂ ਤੇ ਰਸਤਾ ਖਰਾਬ ਹੈ ਨਿਰਗੁਣ ਬੈਲ ਹੈ ਜੋ ਪਹਾੜੀ ਰਸਤੇ ਨੇ ਦੇਖਿਆ ਨਹੀਂ ਹੋਇਆ ਹਾਂਜੀ ਅਸਾ ਬੈਲ ਮਨ ਨੂੰ ਮਨ ਨੂੰ ਕਿਹਾ ਬੈਲ ਹੈ ਕੇ ਹੋਇਆ ਮਨ ਨੂੰ ਪਤਾ ਨਹੀਂ ਨਾ ਹੈ ਉਹ ਤਾਂ ਮਾਇਆ ਦੇ ਵਿੱਚ ਰਹਿੰਦਾ ਦੂਏ ਰਸਤੇ ਦਾ ਪਤਾ ਨਹੀਂ ਨਾ ਉਹਨੂੰ ਰਮਈਏ ਸਿਓ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਰਮਈਏ ਸੇ ਇੱਕ ਬੇਨਤੀ ਆਪਣੇ ਮੂਹਨ ਨੂੰ ਬੇਨਤੀ ਕਰਦੀ ਹੈ ਬੁੱਧ ਬਈ ਤੂੰ ਮੰਨਦਾ ਤਾਂ ਇਹ ਜਾਈ ਕੰਮ ਹੈ ਤਾਂ ਨਮਾ ਇਹ ਤਾਂ ਜੋ ਟ੍ਰੇਨਰ ਨਹੀਂ ਆਇਆ ਇਹਨੂੰ ਤਾਂ ਗਿਆਨ ਹੈ ਨਹੀਂ ਇਹ ਤਾਂ ਜਨਮੇ ਮਾਇਆ ਜੋਇਆ ਹੋਇਆ ਮਾਇਆ ਤੋਂ ਪਰੇ ਦਾ ਇਹਨੂੰ ਗਿਆਨ ਕੋਈ ਨਹੀਂ ਰਬਈਏ ਨੂੰ ਕਿਹਾ ਵੀ ਤੂੰ ਲੈ ਕੇ ਆਇਆ ਮਨ ਤੇਰਾ ਤੋ ਮਾਇਆ ਤੋਂ ਬਾਅਦ ਵੀ ਰਹਿਣਾ ਤੂੰ ਜਿਹੜਾ ਗਿਆਨ ਹੈ ਲੱਦਿਆ ਬੈਲ ਦੇ ਉੱਤੇ ਮਾਲ ਪਿਛਲੇ ਜਨਮਾਂ ਦਾ ਤੂੰ ਇਹਦੀ ਰੱਖੀ ਕਰੀਂ ਕਿਤੇ ਗੂੜੇ ਗਵਾਣਾ ਲਵੇ ਮਾਨੋ ਮਨੁ ਮਾਇਆ ਜਿ ਕੇ ਉਗਣਾ ਜਿ ਫਸਕੇ ਮੂੜ ਨਾ ਗਵਾਲਵੇ ਇਹਨੂੰ ਸਮਝਾ ਕੇ ਰੱਖੀ ਮੈਂ ਬੋੜਦ ਨੂੰ ਇਹ ਜਿਹੜਾ ਸੰਸਾਰੀ ਯਾਤਰਾ ਹੈ ਇਹਦੇ ਵਿੱਚ ਬਹੁਤ ਆਪ ਨੇ ਉਚਾ ਲੀਵਾ ਥਾ ਕਿਤੇ ਗਲਤੀ ਨਾ ਕੋਈ ਐਸੀ ਕਰ ਲਵੇ ਤੇ ਮੂੜ ਗਵਾਲ ਵੇਪਣਾ ਅੱਛਾ ਰਾਖ ਰੱਖੀ ਵਾਸਤੇ ਆਇਆ ਜੀ ਮੇਰੀ ਪੂੰਜੀ ਰਾਖਾ ਰੱਖਾਂ ਅੱਛਾ ਰੱਖਿਆ ਕਰੀ ਦੀ ਹੈ ਜੀ ਹਾਂ ਰੱਖਿਆ ਕਰੀ ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾਦੇ ਰੇ ਰਹਾਓ ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾਦੇ ਜਾਇਰੇ ਕੋ ਬਨਜਾਰੋ RAM ਕੋ ਕੋ ਹੈ ਬਨਜਾਰੋ RAM ਕੋ ਕੋਈ RAM ਦਾ ਵਪਾਰ ਕਰਨ ਵਾਲਾ ਹੈ ਨਾਮ ਦਾ ਵਪਾਰ ਕਰਨ ਵਾਲਾ ਕੋਈ ਉਹ ਦੇ ਰਿਹਾ ਮੇਰਾ ਟਾਂਡਾ ਲਾਦੇ ਜਾਇਰੇ ਮੇਰੇ ਟਾਂਡੇ ਦੇ ਵਿੱਚ ਜਿੰਨੇ ਮੇਰੇ ਘੋੜਿਆਂ ਤੇ ਖਚਰਾ ਤੇ ਬੋਧਾਂ ਤੇ ਮਾਲ ਲੱਦੇ ਹੁੰਦਾ ਸੀ ਉਹਨੂੰ ਟਾਂਡਾ ਕਹਿੰਦੇ ਸੀ ਆਸਤਵਲਾ ਮੇਰਾ ਕਾਫਲਾ ਜਿਹੜਾ ਲੱਦਿਆ ਹੋਇਆ ਹੈ ਕੋਈ ਰਾਮ ਦਾ ਬੰਦਾ ਵਾਜੇ ਮੇਰੇ ਸਾਰੇ ਤੇ ਇੱਕੋ ਹੀ ਚੀਜ਼ ਜਲਤੀ ਹੋਈ ਰਾਮ ਨਾਮ ਰ데요 ਹੈ ਮੇਰੇ ਹੋਰ ਕੁਛ ਹੈ ਹੀ ਨਹੀਂ ਲਤੇ ਮੇਰਾ ਟਾਂਡਾ ਲਾਦੇ ਜਾਇਰੇ ਨਾਲ ਲੜਕੇ ਵਪਾਰ ਹੁੰਦਾ ਹੈ ਨਾਮ ਦਾ ਵਪਾਰ ਹੈ ਮਨਕੱਲਾ ਨਹੀਂ ਕਰਦਾ ਹੈ ਵਪਾਰ ਕੋਈ ਲੜਕਾ ਵੇਚੀ ਲੜਕੀ ਵੇਚੇ ਕੋਈ ਸਾਜਾ ਕਰੇ ਕਬੀਰ ਸਿੰਘ ਹਰ ਸਿੰਘ ਕਰੇ ਹਰ ਜਿਓ ਬਣਜੇ ਹੁੰਦਾ ਉਹ RAM nalay ban jaye oh RAM da banje RAM te bina nahi ho sakda RAM sarayan de andar hai mere kol naam ta na hai je koi aakha kahega ta aajo acha mera taanda ladya likhya je ladde अच्छा श्रद्धा दे रहे हैं बात श्रद्धा अच्छा ए लागदा भी टांडा लदया लंगर तैयार है जिने शकणा आ जो हां शकणा ठीक है इस तरह कह रहे हां बनजारो राम को सहज करो व्यापार ਮੈਂ RAM ਨਾਮ ਧਨ ਲਾਦਿਆ ਵਿਖਲਾਦੀ ਸੰਸਾਰ ਆ ਗਿਆ ਨਾ ਅੱਡੇ ਮੇਰਾ ਲੱਦਿਆ ਹੈ RAM ਨਾਮ ਤਨ ਹਾਂਜੀ ਹੋ ਬਨਜਾਰਾ RAM ਕੋ ਮੈਂ RAM ਦਾ ਬਨਜਾਰਾ RAM ਦੇ ਪਰਥਾਏ ਬਨਜ ਕਰਦਾ ਚੱਕਰ ਨਾ ਦਾ ਮੈਂ ਮਾਲਕ ਨਹੀਂ ਹੈਗਾ ਤੁਹਾਨੂੰ ਮੇਰਾ ਨਹੀਂ ਹੈ ਸੌਦਾ ਮੇਰਾ ਨਹੀਂ ਸੌਦਾ RAM ਦਾ ਹੀ ਹੈ ਮੈਂ ਤਾਂ ਉਹਦਾ ਚੱਕਰਾਂ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਪਾਏ ਮੈਂ ਉਹਦਾ ਬਨਜਾਰਾ ਸਹਿਜ ਕਰੋਂ ਬਪਾਰ ਮੈਂ ਵਪਾਰ ਕਰਦਾ ਸ਼ਹਿਜ ਦਾ ਵਪਾਰ ਕਰਦਾ ਉੱਤੇ ਤੱਕਦਾ ਗਿਆਨ ਦਿੰਦਾ ਜਿੱਥੇ ਤੱਕਦਾ ਮਨ ਤੇ ਕਿੱਡੀ ਬੁਝੇ ਤੇ ਇਹਦੋਂ ਗਾਹ ਦਾ ਗਿਆਨ ਮੇਰੇ ਕੋਲ ਹੈ ਨਹੀਂ ਉਹ ਬਾਕੀ ਨਾਮ ਜਿਹੜਾ ਹੈ ਬਾਕੀ ਵਾਲਾ ਫਿਰ ਉਹ ਹੈ ਮਨ ਬੁੱਧੀ ਕੋਲ ਗਿਆਨ ਸਾਈਂ ਤੱਕਦਾ ਹੈ ਉਦੋਂ ਗਾਹ ਦਾ ਫਿਰ ਜਿਹੜਾ ਨਾਮ ਮਿਲਣਾ ਸਤਗੁਰ ਪਾਇਆ ਜਾਣੇ ਨਾਮ ਦੋ ਪਦਾਰਥ ਤੱਕਦਾ ਗਿਆਨ ਸੁਣਦੇ ਤੇ ਸਮਝਣ ਦੇ ਵਿੱਚ ਇਹ ਰੇਂਜ ਵਿੱਚ ਆ ਉਦੋਂ ਕਹਾਣਾ ਨਹੀਂ ਹੈ ਸੁਣ ਸਮਝ ਤੇ ਪਰੇ ਆਹ ਮੈਂ ਜ ਕਰੂੰਗਾ ਪਾਣ ਤਵੱਸ਼ਾ ਗੁਰਮਤ ਦੇ ਜੋ ਲਿਖਿਆ ਹੋਇਆ ਉਹਦਾ ਹੀ ਵਪਾਰ ਕਰ ਸਕਦਾ ਮੈਂ ਉਦੋਂ ਕਹਾਣੀ ਸਹਿਜ ਦਾ ਭਾਵ ਜਾਗਰਤ ਅਵਸਥਾ ਹੁੰਦਾ ਜੀ ਜਾਗਰਤ ਅਵਸਥਾ ਤੱਕ ਦਾ ਜਾ ਦੋ ਬਿਲਾ ਕਰਦੱਕਦਾ ਮੁਕਤੀ ਤੱਕ ਮੁਕਤ ਪ੍ਰਾਪਤ ਕਰਦਾ ਗਿਆਨ ਔਰ ਮੁਕਤ ਪ੍ਰਾਪਤ ਠੀਕ ਹੈ ਜੀ ਮੈਂ ਰਾਮ ਨਾਮ ਤਨ ਲਾਦਿਆ ਵਿਖਲਾਦੀ ਸੰਸਾਰ ਮੈਂ ਤਾਂ ਰਾਮ ਨਾਮ ਤਾਂ ਲੱਦੇ ਆਪਣੇ ਮਨ ਬੁੱਧੀ ਤੇ ਉੱਤੇ ਸੰਸਾਰ ਨੇ ਬਿਖਲਦੀ ਏ ਮਾਇਆ ਦੇ ਉਹ ਕਥਾ ਕਹਾਣੀਆਂ ਲੱਦੀਆਂ ਨੇ ਸਿਮਰਤੀ శాਸਤਰ ਲੱਦੇ ਨੇ ਕਿਸੇ ਨੇ ਜੋਤਿਸ਼ ਲੱਦੇ ਆਇਆ ਕਿਸੇ ਨੇ ਸਟਾਰੋਲੋਜੀ ਐਸਟ੍ਰੋਨੋਮੀ ਲੱਦੀ ਆ ਕਿਸੇ ਨੇ ਆਯੁਰਵੈਦਿਕ ਲੱਦੇ ਆਇਆ ਹੋਰ ਦੁਨੀਆ ਦਾ ਇਹ ਬੇਦ ਹੋਰ ਗਿਆਨ ਮਿਲਦੇ ਹੋਏ ਉਹ ਸਾਰੀ ਬਿਖਰ ਦਾ ਗਿਆਨ ਹਾਂਜੀ ਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ ਮੋਹੇ ਜਮ ਦੰਡ ਨਾ ਲੱਗ ਗਈ ਤਜਿਲੇ ਸਰਬ ਜੰਗਾਲ ਉਜਿਨੋ ਇਹ ਕਹਿੰਦੇ ਨੇ ਨਾ ਧਰਮਰਾਜ ਕਹਿ ਲੋ ਰਿਆ ਚਿੱਤ ਗੁਪਤ ਕਹਿ ਲੋ ਜਿਹੜਾ ਅਸੀਂ ਕੁਛ ਕਰਦੇ ਨਾਲ ਸਾਡੇ ਤੇ ਨਿਗ੍ਹਾ ਰੱਖਦਾ ਸਾਡੇ ਉਹ ਲਿਖਦਾ ਹੈ ਕਰਮ ਉਹ ਕਹਿੰਦੇ ਵੀ ਮੈਂ ਤਾਂ ਹੁਣ ਉਰਵਾਰ ਪਾਰ ਕੇ ਦਾਨੀਆਂ ਜਿਹੜਾ ਉਰਲੇ ਪਾਸੇ ਦੀਆਂ ਗੱਲਾਂ ਪਾਰਲੇ ਪਾਸੇ ਪਾਰਲੇ ਪਾਸੇ ਦੀ ਉਰਲੇ ਪਾਸੇ ਪਾਸਾਉਣ ਕਰਦਾ ਗੱਲਾਂ ਉਹਨੂੰ ਕਹਿੰਦੇ ਨੇ ਉਰਵਾਦ ਤੇ ਪਾਰ ਪਾਰ ਤੇ ਉਰਵਾਦ ਜਿਹੜਾ ਸੌਦਾ ਦਿੰਦਾ ਹੈ ਸਨੇਹ ਦਿੰਦਾ ਹੈ ਮੈਸੇਜ ਦੇਣ ਵਾਲਾ ਹੈ ਨਿਕਲੇ ਆ ਹਸਪਤਾਲ ਮੇਲੇ ਹੋਣਗੇ ਤਾਂ ਲਿਖਣਾ ਨਾ ਲੇਖਾ ਹਾਲਤ ਕਾਲ ਜੋ ਮਰਜ਼ੀ ਤੇ ਲਿਖੀ ਜਾ ਜੋ ਹਸਪਤਾਲ ਲਿਖੀ ਜਾ ਮੈਂ ਮੈਨੂੰ ਨਹੀਂ ਜਾਂਦਾ ਟੰਡਾ ਲਾਉਣ ਲੱਗਣਾ ਕਿਉਂ ਮੈਂ ਹੁਕਮ ਦੇ ਵਿੱਚ ਆ ਮੈਂ ਕਰਦਾ ਹੀ ਨਹੀਂ ਕੁਝ ਜੇ ਦਾਕਰ ਮੈਂ ਮੰਨਰਾਸੀ ਪੁੰਪਾਪ ਕਰਦਾ ਉਹਨਾਂ ਚਾ ਤੂੰ ਲਿਖਣ ਦਾ ਸੀ ਹੁਣ ਤੂੰ ਮੇਰੇ ਬਾਰੇ ਕੀ ਲਿਖੇਗਾ ਮੈਂ ਕਰਦਾ ਹੀ ਕੁਝ ਨਹੀਂ ਜੇਲਾ ਕਰਦਾ ਉਹਦੇ ਖਿਲਾਫ ਲਿਖੀ ਜਾ ਲਿਖ ਲਿਓ ਆਲ ਪਤਾਇਆ ਮੇਰੇ ਖਿਲਾਫ ਲਗਦਾ ਚਾਹੀਦੀ ਲਿਖੀ ਦੇ ਬਸ ਜੀ ਖਿਲਾਫ ਲਗਦਾ ਪਰ ਮੈਂ ਨਹੀਂ ਕੁਝ ਕਰਦਾ ਲਿਖ ਲਿਓ ਆਲ ਪਤਾਓ ਉਹ ਤੋਂ ਲਿਖੀ ਜਾ ਆਪਣਾ ਜੋ ਕੁ ਲਿਖਣਾ ਜਿਹੜੇ ਮੈਂ ਪੁੰਨ ਪਾਪ ਦਾ ਸੀ ਨਾ ਜਿਹੜਾ ਹਿਸਾਬ ਛੱਡਦਾ ਉਹ ਮੈਂ ਕਿਰੇਆ ਕਰਮਖਾਨ ਦੀ ਜਿਹੜੀ ਸੀ ਨਾ ਤਰੁ ਬਸਾਰੀ ਛੱਡ ਤੇ ਕਰਮਖਾਨ ਦਾ ਜਿਹੜਾ ਧਰਮ ਪੁੰਨ ਪਾਪ ਨੂੰ ਮੰਨਣ ਵਾਲਾ ਇਹ ਸਾਰਾ ਇਹ ਜੰਜਾਲ ਹੈ ਇਹ ਛੱਡਦਾ ਮੈਂ ਇਹ ਧਰਮੋਂ ਇਹ ਧਰਮ ਕਹਦਾ ਤਾਂ ਜੰਜਾਲ ਹੈ ਜਮਦੈ ਜੀ ਸਾਡੀ ਵਾਲਾ ਧਰਮ ਨੇ ਬਨਮਤਾਂ ਪੁਰਬਾਪ ਨੂੰ ਮੰਨਣ ਵਾਲੀਆਂ ਅਰ ਦਾਨ ਕਰਨ ਵਾਲੀਆਂ ਤੀਰਥ ਕਰਨ ਵਾਲੀਆਂ ਹੈ ਜਪਤਾ ਬਸਨ ਧਰਮ ਕਰਨ ਵਾਲੀਆਂ ਇਹ ਜੰਜਾਲ ਹੈ ਧਰਮ ਨਹੀਂ ਹੈ ਇਹ ਮੈਂ ਜੰਜਾਲ ਛੱਡ ਦਿੰਦਾ ਤੇ ਜੀਲੇ ਸਰਬ ਜੰਜਾਲ ਸਾਰਾ ਜੰਜਾਲ ਹੀ ਛੱਡਦਾ ਪਹਿਲਾਂ ਸ਼ੀ ਕਰਦਾ ਇਹਦਾ ਮਤਲਬ ਹੈ ਉਹਦਾ ਪਹਿਲਾ ਜੇ ਜਾਲ ਵਾਲਾ ਧਰਮ ਚ ਫਸਿਆ ਹੋਇਆ ਥਾ ਉਹ ਛੱਡ ਦਿੱਤਾ ਕਬੀਰ ਵੀ ਥਾ ਪਹਿਲਾਂ ਜੇ ਜਾਲ 'ਚ ਫਸਿਆ ਉਹਨੇ ਵੀ ਛੱਡਿਆ ਸੀ ਅੱਛਾ ਆਪਾਂ ਕਰਦਾ ਉਹ ਕੀ ਮਤਲਬ ਉੱਧਰਲਾ ਜਿਹੜਾ ਮੈਸੇਜ ਚਿੱਠ ਤੋਂ ਉੱਧਰਲਾ ਇੱਧਰ ਆਉਂਦਾ ਸਾਨੂੰ ਸੋਚੀ ਆਉਂਦੀ ਹੈ ਸਾਡੀ ਸੀਆਈਡੀ ਉੱਧਰ ਹੁੰਦੀ ਹੈ ਜੋ ਉੱਧਰੋਂ ਸਾਨੂੰ ਮੈਸੇਜ ਆਉਣਾ ਉਹ ਵੀ ਹੋ ਦਿੰਦਾ ਇੱਧਰ ਸਾਡੀ ਸੀਆਈਡੀ ਵੀ ਉੱਧਰ ਉਹ ਦਿੰਦਾ ਸਾਡੀ ਹਰੇਕ ਗੱਲ ਉਹਨੂੰ ਪਤਾ ਆਉਂ ਗਾਹਾਂ ਤੇ ਨੇਖਣਾ ਉਧਰ ਉਧਰ ਪਾਸ ਆਉਣ ਕਰਦਾ ਧਰਮ ਰਾਜ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਗੱਲਾਂ ਖਾ ਤੋ ਉਧੋਂ ਲੱਗੇ ਇਧਰ ਤੇ ਹੁੰਦਾ ਹਾਂਜੀ ਜੈਸਾ ਰੰਗ ਕਸੁੰਭ ਕਾ ਤੈਸਾ ਇਹ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹ ਰਵਦਾਸ ਚਮਾਰ ਜੈਸਾ ਰੰਗ ਕਸੁੰਭ ਕਾ ਜਿਵੇਂ ਫੁੱਲ ਦਾ ਕੋਸਮ ਦਾ ਰੰਗ ਹੁੰਦਾ ਕੋਸਮ ਦਾ ਉਹ ਮੰਗੇ ਦੀ ਜਗਾ ਕੋਸਮ ਮੰਮੀ ਨਾਲ ਹੁੰਦਾ ਭੱਬੇ ਨਾਲ ਤੇ ਬਣਾਇਆ ਨਾ ਕੋਸਮ ਬਤਾ ਬਣ ਗਿਆ ਹਾਂ ਰੂਪ ਲੱਗਦੇ ਹਾਂ ਰੂਪੇ ਦੂਆ ਫੁੱਲ ਦਾ ਰੰਗ ਹੁੰਦਾ ਅਰਥ ਤਾਂ ਫੁੱਲੇ ਕਰਾਂਗੇ ਆਪਾਂ ਹਾਂਜੀ ਐਸਾ ਹੋਇਆ ਸੰਸਾਰ ਜਿਵੇਂ ਫੁੱਲ ਦਾ ਰੰਗ ਜਿੱਕ ਤੱਕ ਪੈ ਜਾਂਦਾ ਤਾਂ ਹੁੰਦਾ ਰੰਗ ਐਸਾ ਸੰਸਾਰ ਹੈ ਐਸਾ ਸਰੀਰ ਹੈ ਜਿਹਨਾਂ ਚ ਆਤਮਾ ਵਿੱਚ ਜਦੇ ਮਰ ਜਾਂਦਾ ਹੈ ਜਦੋਂ ਇਹ ਬਦਲ ਜਾਂਦਾ ਹੈ ਤਾਂ ਠੀਕ ਹੈ ਜੜ ਦਾ ਜਿਹੜਾ ਠੀਕ ਹੈ ਜੀ ਮੇਰੇ ਰਮਈਏ ਰੰਗ ਮਜੀਠਾ ਕਹ ਰਵਿਦਾਸ ਚਮਾਰ ਮੇਰੇ ਰਮਈਏ ਦਾ ਜਿਹੜਾ ਰੰਗ ਮਜੀਠ ਉਹ ਪੱਕਾ ਉਹ ਨਹੀਂ ਫਿੱਟਦਾ ਉਹ ਜਿਉਂਦਾ ਤਿਉਂ ਰਹਿੰਦਾ ਕਹ ਰਮਦਾਸ ਚਮਾਰ ਰਬਦਾਸ ਚਮਾਰ ਕਹਿ ਰਿਹਾ ਰਮਦਾ ਕਹਿੰਦੇ ਨਾ ਵੀ ਇਹ ਬ੍ਰਹਮ ਗਿਆਨ ਨਹੀਂ ਕਰ ਸਕਦੇ ਬ੍ਰਹਮ ਗਿਆਨ ਕਰਕੇ ਚਮਾਰ ਕਹਤਾ ਵੀ ਮੈਂ ਚਮਾਰ ਹਾਂ ਆ ਪਏ ਹੁਣ ਦੱਸੋ ਇਸ ਕੀ ਕਮੀ ਹੈ ਜਾਤ ਪਾਤ ਦਾ ਕੋਈ ਵਿਗਨ ਨਹੀਂ ਹੈ ਬ੍ਰਹਮ ਗਿਆਨ ਚ ਤੇ ਇਸ ਗੱਲ ਨੂੰ ਇੱਥੇ ਰਬਦਾਸ ਚਮਾਰ ਕਹਿ ਕੇ ਉਹ ਕਹਿੰਦੇ ਸੀ ਨਾ ਸਿਮਰਤਿ ਸਾਸਰ ਦੀ ਗੱਲ ਨੂੰ ਝੂਠੀ ਕੀਤਾ ਦੇਖੋ ਲਾ ਨਹੀਂ ਮਿਲਦਾ ਚਿਮਾਰ ਨੂੰ ਤੁਸੀਂ ਕਹਿੰਦੇ ਹੋ ਇਸ ਵਰਤੇ ਵਿੱਚ ਪਰਮੇਸ਼ਰ ਨੇ ਦਿੱਤਾ ਸਮਰਤ ਝੂਠੀ ਹੈ ਤੁਹਾਡੀ ਜਿਹੜਾ ਸਿਆਸਤ ਝੂਠੇ ਨੇ ਜਿਹੜੀ ਕਹਾਣੀ ਆਉਂਦੀ ਹੈ ਅਸ਼ਟਕਾ ਆਪਣੀਆਂ ਵੀ ਕਹਾਣੀਆਂ ਠੀਕ ਹੈ ਇਹ ਕਹਿੰਦਾ ਇਹੀ ਦੱਸਣਾ ਚਾਹੁੰਦੇ ਆ ਜਾਤ ਪਾਤ ਦਾ ਕੋਈ ਵਿਗਨ ਨਹੀਂ ਹੈ ਪਰਮੇਸ਼ਰ ਨੇ ਮੈਨੂੰ ਬ੍ਰਹਮ ਗਿਆਨ ਬਖਸ਼ਤਾ ਜੀ ਆਹ ਕੋਈ ਖੇਰ ਵੀ ਬਖਸ਼ਦਾ ਅਧਿਕਾਰੀ ਹੋਊਗਾ ਬਖਸ਼ਾ ਉਹ ਮਰ ਜੂਗਾ ਅਧਿਕਾਰੀ ਹੋਣਾ ਚਾਹੀਦਾ ਠੀਕ ਹੈ ਜ਼ਰੂਰੀ ਹੈ ਵੀ ਬ੍ਰਾਹਮਣ ਨੂੰ ਹੀ ਬ੍ਰਹਮ ਗਿਆਨ ਬਖਸ਼ਿਆ ਜਾਊਗਾ ਬ੍ਰਹਮ ਵਿਚਾਰ ਕਰੂਗਾ ਉਹ ਬ੍ਰਾਹਮਣ ਠੀਕ ਹੈ ਜੀ ਇੱਥੇ ਇਹ ਸ਼ਬਦ ਦੀ ਸਮਾਪਤੀ ਹੈ ਜੀ